ਸ਼ੇ ਲੋਕ ਮਹੱਲਾ ਚੌਥਾ ਹਰ ਹਰ ਨਾਮ ਅੰਮ੍ਰਿਤ ਹੈ ਹਰ ਜਪੀਏ ਸਤਗੁਰੁ ਪਾਏ ਹਰ ਹਰ ਨਾਮ ਪਵਿੱਤ ਹੈ ਹਰ ਜਪਤ ਸੁਨਤ ਦੁਖ ਜਾਏ ਹ ਹਰ ਹਰ ਨਾਮ ਅੰਮ੍ਰਿਤ ਹੈ ਇਹ ਜਿਹੜਾ ਹਰ ਨਾਮ ਹੈ ਅੰਮ੍ਰਿਤ ਹੈ ਇਹ ਅੰਮ੍ਰਿਤ ਦਾ ਨਾਮ ਵੀ ਅੰਮ੍ਰਿਤ ਹੈ ਹਰ ਜਪੀਏ ਹਾਲ ਨੂੰ ਜਾਣਣਾ ਨਹੀਂ ਇਹ ਹੈ ਚਪੜਾ ਜਿਹੜਾ ਹਰ ਦਾ ਗਿਆਨ ਹੈ ਉਹ ਹਰਨਾਮ ਹੈ ਹਰ ਨੂੰ ਜਪਣਾ ਦਾ ਮਤਲਬ ਹੈ ਹਰ ਨੂੰ ਜਾਣ ਲੈਣਾ ਜਾਣਨਾ ਗਿਆਨ ਪ੍ਰਾਪਤ ਕਰਨਾ ਹੀ ਹੁੰਦਾ ਹਰ ਜਪੀ ਹੈ ਪਾਏ ਹਰ ਨੂੰ ਜਪਣਾ ਹੀ ਸਤਗੁਰੂ ਨੂੰ ਚੰਗਾ ਲੱਗਦਾ ਸਤਗੁਰੂ ਚਾਹੁੰਦਾ ਹੈ ਹਰ ਜਪੋ ਸਾਰੇ ਹਰ ਨੂੰ ਜਾਣੋ ਹਰ ਨਾਮ ਕੋ ਹੈ ਹਰ ਜਪਤ ਸੁਖ ਸੁਖ ਜਾਏ ਹਰ ਨਾਮੁ ਬਿਟ ਹੈ ਸਬਤਰਾ ਹੈ ਜਪਣਾ ਤੇ ਸੁਣਾ ਨਾਲ ਦੁੱਖ ਚਲੇ ਜਾਂਦੇ ਨੇ ਸਾਰੇ ਜਗਨ ਬੋਲ ਨਾਲ ਦੁੱਖ ਟਾਇ ਜਾਂਦਾ ਕਿਸੇ ਹਰ ਕਿਸਮ ਦੀ ਚਿੰਤਾ ਚਿੰਤਾ ਦੁੱਖਿਆ ਚਿੰਤਾ ਮੁਕਤ ਹੋ ਜਾਂਦਾ ਹਰ ਨਾਮ ਤਿਨੇ ਅਰਾਧਿਆ ਜਿਨ ਮਸਤਕ ਲਿਖਿਆ ਤੁਰ ਪਾਏ ਹਰ ਦਰਗਾ ਜਨ ਪੈਨਾਈਨ ਜਿਨ ਹਰ ਮਨ ਵਸਿਆ ਆਏ ਹਾਲ ਰਵਤਨੀ ਆ ਰਾਧਿਆ ਉਹਨਾਂ ਨੇ ਕਿਹਾ ਨਾ ਮਹਾਰਾਧਿਆ ਜੇਰ ਮਾਸਤਕ ਲਿਖਿਆ ਤੁਰ ਪਾਏ ਕਿਹਾਂ ਤੁਰ ਦਰਗਾਹ ਤੋਂ ਮਾਸਤਕ ਆਪਣਾ ਲੈ ਕੇ ਰੰਤ ਨਾ ਹਰਦੇ ਚ ਉਹਨਾਂ ਨੇ ਕਿਹਾ ਤੁਰ ਤੋ ਹੀ ਲੈ ਕੇ ਲਾ ਦੌਰੋਂ ਨੇ ਪਹਿਣਾ ਉਹ ਭੁੱਲੇ ਜੀ ਉਹਨਾਂ ਨੇ ਫਿਰ ਉਹ ਵੇਚਣ ਨਹੀਂ ਦਿੱਤਾ ਲੈ ਗਿਆ ਹੁਣ ਸਰ ਗਿਆ ਜਨ ਪਹਿਨਾਈਆ ਐਥੇ ਜਿਹੜੇ ਜਨ ਸੀ ਉਹੀ ਆ ਦਰਗਾਹ ਦੇ ਵਿੱਚ ਪਹਿਨਾਈ ਇਹ ਹਦਕਤ ਸਿੱਖਾ ਹੁਣ ਉਹਨਾਂ ਦੀ ਬੁੱਧੀ ਉਹ ਥਾਂੜ ਤੇ ਲੱਗਦੀ ਹੈ ਫਿਰ ਕਰਗਾ ਚਾ ਨਾਮ ਮਿਲਦਾ ਜਾਂ ਸਿਰ ਥਾਂੜ ਤੇ ਲੱਗਦੀ ਹੈ ਬੁੱਧੀ ਪੈਣਾ ਇਹ ਤੇਜ਼ ਕਰਨਾ ਹੁੰਦਾ ਪੈਣਾ ਜਿਹੜਾ ਹੁੰਦਾ ਨਾ ਪੈਣਾ ਤਿੱਖੇ ਨੂੰ ਆਂਦੇ ਨੇ ਸ਼ਬਦ ਦੇ ਰਖਾਈ ਲਾਏ ਸ਼ਬਦ ਦੀ ਥਾਂ ਉਹਨਾਂ ਦੀ ਬੁੱਧੀ ਉਹ ਤੇਜ਼ ਹੁੰਦੀ ਹੈ ਤਿੱਖੀ ਹੁੰਦੀ ਹੈ ਜਿਹਨ ਹਰਮਨ ਵਸਿਆ ਆਏ ਜਿਹਨਾਂ ਦੇ ਹਲ ਬੁੱਧ ਦੇ ਵਿੱਚ ਨੋ ਬਸਾ ਲੈਂਦੇ ਨੇ ਜਿਹੜੇ ਉਹਨਾਂ ਦੀ ਬੁੱਧੀ ਤਿੱਖੀ ਹੁੰਦੀ ਚਲੀ ਜਾਂਦੀ ਹੈ ਜਿਹੜੇ ਗੁਰਬਾਣੀ ਨੂੰ ਜਪੀ ਜਾਂਦੇ ਨੇ ਗੋਲਦੇ ਵਿੱਚ ਗੁਰਬਾਣੀ ਦੇ ਗਿਆਨ ਨੂੰ ਵਸਾ ਕੇ ਰੱਖਦੇ ਨੇ ਉਹਨਾਂ ਦੀ బుద్ధి ਤੇਜ਼ ਹੋ ਜਾਂਦੀ ਹੈ। ਜਨ ਨਾਨਕ ਤੇ ਮੁਖ ਉਜਲੇ ਜਿਨ ਹਰ ਸੁਣਿਆ ਮਨ ਪਾਏ। ਜਨ ਨਾਨਕ ਤੇ ਮੁਖ ਉਜਲੇ ਤਾਂ ਉਹ ਗੁਖੀ ਵਾਲੇ ਨੇ ਉਜਲੇ ਹੋ ਜਾਂਦੇ ਨੇ। ਉਹਨਾਂ ਦਾ ਕਲੰਕ ਮਿੰਟ ਜਾਂਦਾ ਕਾਲਖ ਮਿੰਟ ਜਾਂਦੀ ਹੈ। ਜਿਨ ਹਰ ਸੁਣਿਆ ਬੋਧ ਪਾਏ। ਜਿਨ੍ਹਾਂ ਨੇ ਹਰ ਸੁਣਿਆ ਅਰ ਬੜਾ ਉਹਨਾਂ ਨੂੰ ਮਿੱਠਾ ਲੱਗਿਆ ਜਿਨ੍ਹਾਂ ਨੇ ਸੱਚ ਸੁਨੇਆ ਸੱਚ ਮਿੱਠਾ ਲੱਗਿਆ ਜਿਨ੍ਹਾਂ ਨੂੰ ਨਾਮ ਆਬਰਤ ਮਿੱਠਾ ਲੱਗਿਆ ਜਿਨ੍ਹਾਂ ਨੂੰ ਗੁਰਬਾਣੀ ਦਾ ਗਿਆਨ ਮਿੱਠਾ ਲੱਗਿਆ ਗੁਰਬਾਣੀ ਦਾ ਸੱਚ ਜਿ ਇਹਨਾਂ ਨੂੰ ਮਿੱਠਾ ਲੱਗਦਾ ਉਹ ਉਹਨਾਂ ਦੀ ਗੱਲ ਹੈ ਸਾਰਿਆਂ ਨੂੰ ਮਿੱਠਾ ਲੱਗਦਾ ਨਹੀਂ ਪਰ ਤਕੌੜਾ ਲੱਗਦਾ ਮਹੱਲਾ ਚੌਥਾ ਹਰ ਹਰ ਨਾਮ ਨਿਧਾਨ ਹੈ ਗੁਰਮੁਖੀ ਪਾਇਆ ਜਾਏ ਜਿਨ ਨੂੰ ਧੁਰ ਮਸਤਕ ਲਿਖਿਆ ਤਿੰਨ ਸਤਗੁਰ ਮਿਲਿਆ ਆਏ ਹਰ ਹਰਮਹਾਦਾਨਾ ਵਦਾਨਾ ਕ੍ਰਿਸਟਿਅਨਵਾਦਾਂ ਜਿਹੜਾ ਇਹੀ ਖਜ਼ਾਨਾ ਖਜ਼ਾਨਾ ਜਾਣ ਹੈ ਹਰ ਹਰ ਹਰ ਹਰ ਕਰੀ ਜਾਈਏ ਤਾਂ ਖਜ਼ਾਨਾ ਜੁੜਨਾ ਹੈ ਜੀ ਤੇ ਨਾ ਇਹਨੂੰ ਖਜ਼ਾਨਾ ਕਹਿ ਸਕਦੇ ਆ ਬਾਰ ਬਾਰ ਐ ਜਿਹੜੀਆਂ ਗੱਲਾਂ ਤਾਂ ਕਹਿੰਨ ਨੇ ਹਰ ਕਰਨਾ ਇਹ ਖਜ਼ਾਨਾ ਨਹੀਂ ਬੜਨਾ ਇਹਦੇ ਨਾਲ ਹਰ ਦਾ ਗਿਆਨ ਹੀ ਹਰ ਦਾ ਨਾਮ ਹੈ ਸਮਝਾਉਣਾ ਚਾਹੁੰਦੇ ਨੇ ਕੁਝ ਜੋ ਪਿੱਛੇ ਕਰਦੇ ਸੀ ਹੁਣ ਫੇਰ ਉਹੀ ਗੱਲ ਸ਼ੁਰੂ ਕਰ ਲਈ ਇੱਕ ਸ਼ਬਦ ਨੂੰ ਲੈ ਕੇ ਵਿਚਾਰ ਕਰਨਾ ਬਾਰ-ਬਾਰ ਇਹਦੇ ਨਾਲ ਖਿਆਦੋ ਦੀ ਜੁੜਦਾ ਹੁੰਦਾ ਹੈ ਉਹਨਾਂ ਦਾ ਗੁਰਸਖ ਹੈ ਕਿਹੜਾ ਦਾ ਕਿਹੜਾ ਨਾ ਹੈ ਗਿਆਨ ਦਾ ਜੁੜਦਾ ਹੁੰਦਾ ਹੈ ਇਹੀ ਨਾਮ ਗਿਆਨ ਹੈ ਜਿਹੜਾ ਜਿੰਨਾ ਖਰਚੀ ਹੋਰੋਂ ਵੱਧ ਹੈ ਤੂੰ ਜਾਣੀ ਬਥਿਆ ਕਰੇ ਇਕੱਠਾ ਹੀ ਨਹੀਂ ਹੋਇਆ ਬਦੂ ਤਾ ਉਹ ਇਹ ਇਕੱਠਾ ਹੋ ਇਕੱਠਾ ਹੀ ਦੀ ਹੁੰਦਾ ਹੋਰ ਕੁਝ ਗਿਆਨ ਤੇ ਬਿਨਾਂ ਹਰ ਆਲ ਨਾਮ ਦਾ ਹਨ ਹੈ ਤੇ ਹਰ ਆਲ ਨਾਮ ਇਹ ਨਾ ਆਉਂਦਾ ਗੁਰਮੁਖੀ ਪਾਇਆ ਜਾਏ ਗੁਰਮੁਖੀ ਸੁਭਾਣ ਵਾਲੇ ਪਾਇਆ ਜਾਂਦਾ ਗੁਰਮੁਖ ਬਣ ਕੇ ਹੀ ਪਾਇਆ ਜਾਂਦਾ ਗੁਰਬਾਣੀ ਦੀ ਗੱਲ ਨੂੰ ਜਿਹੜਾ ਬੁੱਝਣ ਗੁਰਮੁਖਤਾਈ ਹੈ ਸ਼ੰਕਾ ਨਹੀਂ ਕਰਦੀ ਇਹ ਗੁਰਮੁਖਤਾਈ ਹੈ ਗੁਰਬਾਣੀ ਤੋਂ ਪੜਨਾ ਗੁਰਮੁਖਤਾਈ ਹੈ ਗੁਰਬਾਣੀ ਰੂਹੀ ਪੜ੍ਹੋ ਗੁਰਬਾਣੀ ਰੂਪਾਂ ਤੇ ਪੜ੍ਹਦੇ ਗੁਰਬਾਣੀ ਤੋਂ ਕਢੀਦਾ ਜਿਹਦੇ ਤੁਰ ਬਸਤਕ ਲਿਖਿਆ ਤਿੰਨ ਸਤਗੁਰ ਮਿਲਿਆ ਆਏ ਜਿਹਨਾਂ ਨੇ ਆਹ ਨੰਤਰ ਮਜਬੂਤੀ ਦਾ ਮੰਨਿਆ ਆਇਆ ਨਾ ਫੇ ਇਹ ਪ੍ਰਾਪਤੀ ਕਰਦੀ ਹੈ ਕੀਤੀ ਰੀਜਨਲ ਦੇ ਵਿੱਚ ਪਰ ਉਹਨਾਂ ਨੂੰ ਸਤਗੁਰ ਦਾ ਦਰਸ਼ਨ ਹੋ ਜਾਂਦਾ ਆਪਣੇ ਉੱਤਰਾਂ ਵਿੱਚ ਹੈ ਜੀ ਤਨ ਮਨ ਸੀਤਲ ਹੋਇਆ ਸ਼ਾਂਤੀ ਵਸੀ ਮਨ ਆਏ ਨਾਨਕ ਹਰ ਹਰ ਚਾਉਂਦਿਆਂ ਸਭ ਦਾਲਗ ਦੁੱਖ ਲਹ ਜਾਏ ਇਹ ਜਿਹੜਾ ਉਹਨਾਂ ਨੂੰ ਬਿਲਕੁਲ ਨਹੀਂ ਰਹਿੰਦੀ। ਸ਼ਾਂਤੀ ਬਸੇਵਾ ਨਾਲ ਆਏ ਆ ਮਨ ਦੇ ਵਿੱਚ ਸ਼ਾਂਤੀ ਵੱਸ ਜਾਂਦੀ ਹੈ। ਨਾਨਕ ਹਰ ਹਰ ਚੰਦਿਆਂ ਹਰ ਹਰ ਉਚਾਰਨ ਕਰਦੇ ਆ ਬੋਲਦੇ ਆ। ਹਰ ਦੀ ਕਥਾ ਕਰਦੇ ਆ। ਸਭ ਦਾਲਤ ਲੈ ਜਾਏ, ਸਭ ਦੁਲਦਨ ਦੁੱਖ ਦੂਰ ਹੋ ਜਾਂਦੇ ਨੇ। ਹਾਂ ਦਾਲਤ ਦੁੱਖ ਜਾਂਦਾ ਜਾਂਦਾ ਜਦੋਂ ਆਪ ਬੋਲਦਾ ਹਰ ਕੀ ਕਥਾ ਕਰਦਾ। ਫੇ ਲੈਣੇ। ਜਦੋਂ ਹਰ ਨਾਮ ਦਾ ਵਿਖਿਆਨ ਕਰਦਾ ਹਾਂ ਜੀ ਐ ਕਿਉਂ ਕਿ ਆਨ ਨੂੰ ਵਿਖਿਆਨ ਕਰਨਾ ਬੋਲ ਤਾਂ ਦਾਲਤ ਤੋਂ ਦੂਰ ਹੁੰਦੇ ਨੇ ਜੀ ਪੌੜੀ ਹਉ ਵਾਰਿਆ ਤਿੰਨ ਕੋ ਸਦਾ ਸਦਾ ਜਿਨ੍ਹਾਂ ਸਤਗੁਰ ਮੇਰਾ ਪਿਆਰਾ ਦੇਖਿਆ ਤਿੰਨ ਕੋ ਮਿਲਿਆ ਮੇਰਾ ਸਤਗੁਰ ਜਿਨ ਕੋ ਮਸਤਕ ਲਿਖਿਆ ਹਉ ਵਾਰਿਆ ਤਿੰਨ ਕੋ ਸਦਾ ਸਦਾ ਮੈਂ ਉਹਨਾਂ ਦੇ ਸਦਾ ਸਦਾ ਵਾਸਤੇ ਕੁਰਬਾਨ ਜਾਂਦਾ ਜਿਹੜਾ ਸਤਗੁਰੂ ਬੇਰਾ ਤੇ ਆਰਾ ਦੇਖਿਆ ਪਿਰਾਨੇ ਆਪਣੇ ਅੰਦਰੋਂ ਮੇਰਾ ਪਿਆਰਾ ਸਤਗੁਰੂ ਦੇਖ ਲਿਆ ਦਰਸ਼ਨ ਕਰ ਲਿਆ ਉਹਦਾ ਮੇਰਾ ਇੱਕੋ ਹੀ ਆ ਫਿਰ ਸਤਗੁਰੂ ਇੱਕ ਹੀ ਆ ਸਾਰਿਆਂ ਦੇ ਅੰਦਰ ਹੀ ਹੁੰਦਾ ਉਹ ਸਭ ਦਾ ਸਾਂਝਾ ਹੀ ਆ ਘਟ ਘਟ ਮੈਂ ਹਰ ਬਸਿਆ ਹਰ ਸਭ ਦੇ ਅੰਦਰ ਹੈ ਹੀ ਆ ਤੈਨੂੰ ਮਿਲਿਆ ਬੇਰਾ ਸਤਗੁਰੂ ਬੇਰਾ ਸਤਗੁਰੂ ਉਹਨੂੰ ਮਿਲਣਾ ਹੈ ਕੌਣ ਹੈ ਸਤਗੁਰੂ ਧੁਰ ਕੀ ਬਾਣੀ ਫਿਰ ਸ਼ਬਦ ਗੁਰੂ ਨਾਬ ਜਿਹਨ ਕੋਰ ਮਾਸਕ ਲਿਖਿਆ ਜਿਹਨੇ ਹਿਰਦੇ ਪੂਰਾ ਲਿਖ ਲਿਆ ਡਰਨੇ ਚਾਹੀਦਾ ਲਿਖੇ ਤਾਂ ਡਰਨੇ ਚਾਹੀਦੇ ਸਿਰਨੇ ਚਾਹੀਦੇ ਉਹਨਾਂ ਨੂੰ ਮਰ ਜਾਂਦਾ ਜਿਹੜੇ ਅਡੋਲ ਖੜੇ ਰਹਿੰਦੇ ਨੇ ਵੀ ਮਿੜੂਗਾ ਪਰ ਸੱਚੀ ਹਰ ਅਗੰਮ ਤੇ ਆਇਆ ਗੁਰਮਤੀ ਤਿਸ ਰੂਪ ਨਹੀਂ ਪ੍ਰਭ ਰੇਖਿਆ ਗੁਰਬਚਨੀ ਤੇ ਆਇਆ ਜਿਨ੍ਹਾਂ ਅਗੰਮ ਹਰ ਤੇ ਠਾਕੁਰ ਸੇਵਕ ਰਲ ਏਕਿਆ ਅਰ ਆਗਮ ਤੇ ਆਇਆ ਉਹ ਹਰ ਆਗਮਾਂ ਬੁੱਧੀ ਤੋਂ ਪਰਿਆ ਇਹ ਅੱਖਾਂ ਨੂੰ ਨਹੀਂ ਦੇਖਿਆ ਜਾ ਸਕਦਾ ਉਹ ਜਿਹੜਾ ਅਸੀਂ ਅੱਖਾਂ ਨਾਲ ਦੇਖਣ ਦੀ ਉਹ ਮੂਰਤੀ ਦੇ ਅਸਲ ਦੇ ਵਿੱਚ ਉਹ ਵੀ ਉਹ ਆਗਮਾਂ ਬੁੱਧੀ ਤੋਂ ਪਰਿਆ ਇਹ ਤਾਂ ਬੁੱਧੀ ਗਾਣੇ ਨੇ ਬਣਾਈ ਹੈ ਜਿਹੜੀ ਮੂਰਤੀ ਹੈ ਜਿਹੜਾ ਆਗਮਾਂ ਮੂਰਤੀ ਕਿਵੇਂ ਬਣਾ ਲੋਗੇ ਗੁਰਮਤਿ ਇਸ ਰੂਪ ਨਹੀਂ ਪ੍ਰਭ ਰਖਿਆ ਗੁਰਬਖਤੇ ਆਉਤੇ ਆਇਆ ਬਹੁਤ ਦੇ ਧਿਆਨ ਜੋੜਿਆ ਉਹਦੇ ਗੁਰਮਤ ਨੇ ਦੱਸਿਆ ਵੀ ਇਹ ਜੇ ਤਾਂ ਤੇ ਗਿਆਨ ਕਰਾਇਆ ਗੁਰਮਤ ਨੇ ਤਾਂ ਤੇ ਆ ਕੇ ਉਹਦੀ ਰੂਪ ਰੇਖਾ ਕੋਈ ਨਹੀਂ ਹੁੰਦੀ ਰੂਪ ਆਇਆ ਨਹੀਂ ਆ ਵੀ ਜਿਹਦਾ ਰੇਖਾ ਹਕਤ ਕੀਤਾ ਜਾ ਸਕਦਾ ਅਕਸਰ ਰੂਪ ਨਹੀਂ ਬਣਦਾ ਉਹਦਾ ਗੁਰਬਚਨ ਹੀ ਤੇ ਆਇਆ ਜਨਾ ਗੁਰਬਚਨ ਹੀ ਤੇ ਆਇਆ ਜਨਾ ਆ ਜਿਹੜੀ ਕੁਰਬਾਨੀ ਦੇ ਬਚਨ ਨੇ ਇਹਨਾਂ ਨੂੰ ਸਮਝ ਕੇ ਜਿਨ੍ਹਾਂ ਨੇ ਧਿਆਨ ਜੋੜਿਆ ਨਾ ਜਿਹੜਾ ਦੱਸਿਆ ਹੋਇਆ ਕੁਰਬਾਨੀ ਚ ਹਰ ਉਹਦੇ ਨਾਲ ਧਿਆਨ ਜੋੜਿਆ ਜਿਹੜਾ ਦੱਸਿਆ ਉਹ ਜਦੋਂ ਲੱਭ ਗਿਆ ਪਿੱਛੇ ਉਹਨਾਂ ਨੂੰ ਆਪਣੇ ਅੰਦਰੋਂ ਕਿਹਨਾ ਅਗੰਭ ਹਰ ਉਹ ਅਗੰਭ ਹਰ ਹੈ ਤੇ ਠਾਕੁਰ ਰਲ ਇਕਿਆ ਉਹ ਹਰ ਅਰ ਹੋ ਜਾਂਦੇ ਨੇ ਉਹ ਉਹ ਮੂਲ ਨਾਲ ਰਲ ਕੇ ਇੱਕ ਹੋ ਜਾਂਦੇ ਨੇ ਉਹ ਆਪਣਾ ਮੂਲ ਦੇਖਣਾ ਹੋਰ ਆਪਣਾ ਮੂਲ ਆਪਣਾ ਠਾਕੁਰ ਠਾਕੁਰ ਬਨਵਾ ਰੱਖੋ ਠਾਇ ਠਾਕੁਰ ਨਾਲੇ ਬਨਵਾ ਟਿਕਣਾ ਮੰਨਦੇ ਉਹਦੇ ਨਾਲ ਉਹਦੇ ਬਿਨਾਂ ਟਿਕਣਾ ਨਹੀਂ ਸੀ। ਰੰਡਾ ਭਾਵ ਪਹਿਲਾਂ ਠਾਕੁਰ ਵੀ ਅੱਧਾ ਸੀ ਤੇ ਸੇਵਕ ਵੀ ਅੱਧਾ ਸੀ ਤੇ ਦੋਵੇਂ ਮਿਲ ਕੇ ਇੱਕ ਹੋ ਗਏ। ਆਇ ਇੱਕ ਹੋ। ਜੇ ਇਹ ਤੋਂ ਜ਼ਿਆਦਾ ਸਪਸ਼ਟ ਤੌਰ ਤੇ ਗੁਰਾ ਦੇ ਬੁਝਾਈ ਸ਼ਾਇਦ ਕਿਤੇ ਵੀ ਨਹੀਂ ਅਜੇ ਤੱਕ ਦੱਸਿਆ ਗਿਆ। ਸੋ ਇੱਕ ਦੀ ਜੋ ਗੁਰਾ ਇੱਕ ਦੇ ਬੁਝਾਈ ਜੋ ਗੱਲ ਗੁਰੂ ਨਾਨਕ ਸਾਹਿਬ ਨੇ ਸ਼ੁਰੂ ਕੀਤੀ ਸੀ ਜਪਜੀ ਸਾਹਿਬ ਮਨੁ ਇੱਥੇ ਆ ਕੇ ਫੇਰ ਦੁਬਾਰਾ ਸਰਲ ਅਰਥਾਂ ਵਿੱਚ ਖੋਲਿਆ ਹੋਰ ਹੋਰ ਇੱਕ ਇਹ ਆਪੇ ਕੋ ਉ ਤਾਂ ਇਹਨੂੰ ਪਤਾ ਲੱਗੂਗਾ ਹੋਰ ਕਿੱਥੋਂ ਪਤਾ ਲੱਗੂਗਾ ਬਾਹਰੋਂ ਤਾਂ ਗਿਆਨ ਅੰਦਰੋਂ ਦੇਖਣ ਵਾਲੇ ਹਾਂਜੀ ਸਭ ਕਹੋ ਮੁਖੋਂ ਅਸਰੀਰ ਨੋ ਹਰਾ ਪ੍ਰਕਰਨ ਵਾਲਾ ਨਾ ਰਹੋ ਨਾਲ ਨੂੰ ਸਬੋਧਨ ਕੀਤਾ ਨਾ ਰੇਣਾ ਦੇ ਗਰਭ ਕੁੰਡਲ ਜਦ ਆਖੇ ਤੇ ਉਰਦ ਕੇ ਆਂਦੇ ਬੁਲਾਗਾ ਜਿਹੜਾ ਫੰਕ ਉਹ ਉਹ ਹੀ ਨਾਰ ਹੈ ਇਹ ਜਿਹੜਾ ਉਹਨੇ ਹਰਾ ਕੀਤਾ ਹੋਇਆ ਨਰ ਨਰ ਹਰੇ ਨਾਲ ਨੇ ਇਹ ਅਸਰੀਰ ਜਿਹੜਾ ਨਾਲ ਵਾਲਾ ਹਰਾ ਕੀਤਾ ਹੋਇਆ ਨਾਲ ਨਾ ਰਹੇ ਹਰਲਾਹ ਹਰ ਭਗਤ ਵਿਖਿਆ ਜਿਹੜਾ ਹਰ ਲਾਹ ਹਰ ਭਗਤੀ ਦੇ ਵਿੱਚੋਂ ਵਿਸ਼ੇਸ਼ ਤੌਰ ਤੇ ਪ੍ਰਾਪਤ ਹੈ ਗੁਰਬਤ ਵਿੱਚੋਂ ਹੀ ਹਰ ਲਾਹ ਪ੍ਰਾਪਤ ਹੁੰਦਾ ਹੈ ਵਿਸ਼ੇਸ਼ ਤੌਰ ਤੇ ਵਿਸ਼ੇਸ਼ ਕਿਸਮ ਦਾ ਲਾਹ ਜਿਹੜਾ ਹੋਰ ਕਿਤੇ ਨਹੀਂ ਪ੍ਰਾਪਤ ਹੋ ਸਕਦਾ ਕੋਣ ਹੋ ਕੇ ਲਿਆਂ ਦੇ ਲਾਹ ਹੋਰ ਤਾਂ ਮਨਮੁਖਾਂ ਦੀ ਗੱਲ ਹੈ ਜੇ ਗੁਰਮੁਖ ਨਹੀਂ ਤਾਂ ਬਨਮੁਖ ਹੈ ਉਹ ਬਨਮੁਖ ਨੇ ਕੀ ਲਾਹ ਲੱਗੇ ਕਿੱਥੋਂ ਲੱਗੇ ਜਾਣ ਮਨਮੁਖ ਦਾ ਗੁਰੂ ਨੂੰ ਮੰਨਦਾ ਹੀ ਨਹੀਂ ਹੁੰਦਾ ਕਿਸੇ ਉਹਦਾ ਆਪੇ ਗੁਰੂ ਹੁੰਦਾ ਹੈ ਇੱਥੇ ਨੌਵੀਂ ਪੌੜੀ ਦੀ ਸਮਾਪਤੀ ਹੈ ਜੀ ਜੀ